ਸ਼ਲੋਕ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਲਾਏ ਹਰ ਵੇ ਨਾਨਕ ਨਾਮ ਅਮੋਲ ਬਹੁਤ ਸਿਮਰਤੋ ਸ਼ਾਸਤਰੀ ਬੜੇ ਸੇ ਪੜੇ ਕੋਣ ਆ ਬੜੇ ਸ਼ਲੋਕ ਹੈ ਜੀ ਹਾਂ ਹਾਂ ਜਿਹੜੇ ਪੜੇ ਸਿਮਰਤੀ ਪੇਖੇ ਸਰਬ ਜਿਹੜੇ ਆਏ ਨੇ ਉਹ ਨੇ ਪੜੇ ਹੋਏ ਨੇ ਸਾਰੇ ਢੰਡੋਲ ਖੋਜੇ ਨੇ ਤਾਂ ਗੱਲਾਂ ਨੇ ਬਹੁਤ ਸਿਮਰਤ ਸ਼ਾਸਤਰੀ ਪੇਖੇ ਸਰਬ ਢੰਡੋਲ ਸਾਰੇ ਸਾਰੇ ਫੋਲ ਕੇ ਦੇਖ ਲੇ ਪੁੱਜੇਸ ਨਹੀਂ ਆ ਰਹਾ ਰੇ ਨਾਨਕ ਨਾਮ ਨੂੰ ਬੋਲ ਮਹਾਰਾ ਪੁੱਜੇ ਪਹੁੰਚਣ ਦੀ ਗੱਲ ਹੈ ਉਹਦੇ ਬਰਾਬਰੀ ਨਹੀਂ ਕਰ ਸਕਦੇ ਨਾਮ ਤੋਂ ਲੁਕਾਇ ਕੋਈ ਅਵਨ ਨਾ ਹੋਏ ਲਾਸਟ ਵਿੱਚ ਆ ਨਾਮ ਤੋਂ ਪਿੱਛੇ ਵਰਨਾ ਹੋਏ ਉਸੇ ਦੀ ਗੱਲ ਵੀ ਆਇਆ ਨਹੀਂ ਸਭ ਤੋਂ ਉੱਤਮ ਕਿਹੜੀ ਹੈ ਤੋਂ ਉੱਤਮ ਹੋਰ ਵੀ ਨਹੀਂ ਕਹਤਾ ਨਾਮਤੁੱਲ ਨੂੰ ਕੁਛੇ ਬਰ ਨਾ ਹੋਏ ਹੋਣਾ ਉਹਨਾਂ ਨੇ ਅਬਰ ਹੋਏ ਦੀ ਪ੍ਰੋੜਤਾ ਖਤਮ ਸਭ ਨੂੰ ਦਾ ਸ਼ਾਸਤਰ ਚੱਕੇ ਜੋ ਤੇ ਕੀ ਲਿਖਿਆ ਹੋਇਆ ਇਹਦਾ ਅਧਾਰ ਤੇ ਅਸੀਂ ਕਿਹਾ ਇਹ ਜਿਹੜੀ ਗੱਲ ਤਾਂ ਜੇ ਕੋ ਪੁੱਛੇ ਵੀ ਆਪਾਂ ਨੂੰ ਪੁੱਛਣ ਨੂੰ ਤੇਰੇ ਕੋ ਕੀ ਦਾ ਹੈ ਗੱਲ ਅਧਾਰ ਕੀ ਹੈ ਕਹਿੰਦੇ ਬਹੁਤ ਜ਼ਬਰਦਸਤ ਬਹੁਤ ਸ਼ਾਸਤਰ ਬੇਖੇ ਸਭ ਤੋਂ ਲੋਕ ਸਿੱਖੇ ਬੇਖੇ ਸਭ ਨੇ ਸਮਝ ਲੈ ਸਮਝ ਲੈ ਐਵੇਂ ਨਹੀਂ ਕਰਦੇ ਖੋਲ ਕੇ ਸਾਰੇ ਸਮਝ ਲੈ ਖੋਜ ਲੈ ਉੱਜ ਸਮਾਈ ਹਰ ਹਰੇ ਨਾਨਕ ਨਾਮ ਉਹ ਉਹ ਆਪ ਕਹਿੰਦੇ ਨੇ ਉਹਦੇ ਬਰਾਬਰ ਨਹੀਂ ਪੁੱਜਦੇ ਨਾਮ ਜਰਾ ਨਾਮ ਜਰਾ ਉਨਾ ਮਹੌਲਾ ਦੇ ਬਰਾਬਰ ਕੁਝ ਵੀ ਇਹ ਲੋਟ ਕੋਈ ਤੋਂ ਆਪ ਬੁੱਧ ਜੀ ਨੇ ਉਹ ਦੇਖੀ ਇਹ ਸੰਸਾਰ ਦੇ ਜਿਹੜਾ ਹੈ ਰਾਜ ਭਗ ਸਭ ਕੁਝ ਹੈ ਇਹ ਤਾਂ ਵਿੱਠਿਆ ਵਿੱਠਿਆ ਰਾਜ ਉਹਨਾਂ ਹਾਲ ਆ ਜਾਣਾ ਸਭ ਕੁਝ